ਕਦੇ ਹਾਂ ਜਦ ਆਕਾਰ ਇੱਕ ਅਸ਼ੂਨਾ ਦਿਸੇਤਾ ਪਾਪ ਪੁੰਨ ਤਾਲ ਕਹਤੇ ਹੁੰਦਾ ਜਦ ਆਕਾਰ ਇੱਕ ਅਸ਼ੂਨਾ ਦੇਖੇਤਾ ਜਦ ਇਹਦਾ ਆਕਾਰ ਕੋਈ ਨੀ ਸੀ ਚਲਵੇਂ ਨਹੀਂ ਸੀ ਲਿਆਏ ਨੇ ਇਹ ਪਾਪ ਉਹ ਜੋ ਮੈਂ ਕਰ ਸਕਦਾ ਸੀ ਫਿਰ ਤੁਸੀਂ ਕਹਿੰਦੇ ਹੋ ਵੀ ਪਾਪ ਪੁੰਨ ਦਾ ਲਿਖਾ ਦੇਣਾ ਹੈ ਇੱਥੇ ਇਹ ਤਾਂ ਗੱਲੇ ਝੂਠ ਹੋ ਗਈ ਫਿਰ ਉਹ ਪਾਪਨ ਦਾ ਜਦੇ ਕਰੂਗਾ ਜਾਂ ਸ਼ਰੀਰ ਦਾ ਹਲ ਕਰੂਗਾ ਸ਼ਰੀਰ ਜੋ ਮਿਲਿਆ ਜੀ ਪਾਪਨ ਕਦ ਕਰ ਲਿਆ ਨੇ ਕਿਹੜੇ ਵੇਲੇ ਕਰ ਲਿਆ ਸੁਪਨੇ 'ਚ ਕਰ ਲਿਆ ਜਿਹੜਾ ਉਹਨਾਂ ਨੇ ਇਹ ਥਿਊਰੀ ਪਹਿਲਾਂ ਬਣਾਇਆ ਪਾਪੁਰ ਦਾ ਲੇਖਾ ਦੇਣਾ ਹੈ ਇਥੇ ਝੂਠ ਹੈ ਉਹਨਾਂ ਦਾ ਪਹਿਲੇ ਹੀ ਸਵਾਲੇ ਝੂਠ ਬਾਨੇ ਮਖੋਂ ਬੁੱਢੋਂ ਵਿੱਚ ਲੱਭ ਲੋਭ ਇਹ ਬੁੱਢੋਂ ਪਹਿਲੇ ਕਦਮੇ ਝੂਠ ਬੋਲਦਾ ਜਿਨ੍ਹਾਂ ਨੇ ਮਖ ਬਣਾਈ ਹੈ ਪਹਿਲੀ ਗੱਲ ਝੂਠੀ ਹੈ ਇਹਨਾਂ ਦੀ ਜਿਹੜੇ ਕਹਿੰਦੇ ਨੇ ਪਾਪ ਪੁੰਨ ਦਾ ਲੇਖਾ ਦੇਣਾ ਹੈ ਸਵਾਲ ਪਰਮੇਸ਼ਾਨਾ ਖੜਾ ਕੀਤਾ ਕਿ ਜਦੋਂ ਤੇ ਕੋਈ ਸਰੀਰ ਹੀ ਨਹੀਂ ਸੀ ਪਾਪ ਉਹਨੇ ਕਿਵੇਂ ਕਰ ਸਕਦਾ ਸੀ ਇਹ ਦੇਖੋ ਅੱਜ ਤੱਕ ਇਹਦਾ ਜਵਾਬ ਨਹੀਂ ਦਿੱਤਾ ਕਿਸੇ ਨੇ ਲੇਕਿਨ ਪਾਪ ਪੁੰਨ ਦਾ ਪ੍ਰਚਾਰ ਫਿਰ ਤੇ ਨਹੀਂ ਹੱਸ ਇਸ ਗੱਲ ਦਾ ਜਵਾਬ ਨਹੀਂ ਦਿੰਦਾ ਇਸੇ ऐसे अश्पटी रोज फाट कर दे संत लेकिन पाप पुण्य प्रचार फिर कर दे कौन हो ये ये संत कौन होए ब्लैकमेलर होए गुरमत ए ओ धड़े चो जेड़ा तला गुरमत के खिलाफ प्रचार करता सी बीड़ीया दा ए बीड़ीया दे साडे पड़दे कुछ और ने प्रचार कुछ और कर गुरबानी गुरु कुछ और कहंदा प्रचार बदला से करदे ने पड़तोड़ा ਤੁਸੀਂ ਕਿ ਮੈਂ ਪ੍ਰਚਾਰ ਕਰ ਸਕਦਾ ਬਾਪੂ ਜੀ ਗੁਰਬਾਣੀ ਜ਼ਬਰਦਸਤ ਦੀ ਪਿਛਲੇ ਕਰਮਾ ਦਾ ਫਲ ਕਰਮ ਕਰੂਗਾ ਜਾਂ ਸ਼ਰੀਰ ਹੋਊਗਾ ਤਾਂ ਹੀ ਕਰੂਗਾ ਜਨਮ ਕਿਵੇਂ ਹੋਇਆ ਸਵਾਲ ਨੇ ਕਿ ਸੀ ਕਰਮ ਬੰਧ ਤਮ ਜੀ ਕਹਤੋ ਇਹ ਜੀ ਬੰਦਵੇਂ ਪਾਸ਼ਾ ਨੇ ਕਿਹਾ ਪਹਿਲਾਂ ਰਬਦਾਸ ਦਾ ਕਿਹਾ ਹੋਇਆ ਪਹਿਲਾਂ ਖਬੀਰ ਦਾ ਕਿਹਾ ਹੋਇਆ ਉਸੇ ਗੱਲ ਨੂੰ ਅਖੇ ਬਿਧਾਇਆ ਗੁਰੂਆਂ ਨੇ ਕਰਮ ਬੰਧ ਤੁਮ ਜੀ ਕਹਤੋ ਕਰਮ ਹੈ ਕਦ ਜਿਉ ਦੀ ਜੇ ਜੀ ਜੀਓ ਸੀ ਜਦੋਂ ਤੇ ਹੈ ਦੀ ਸੀ ਉਦੋਂ ਇਹਨੂੰ ਕਰਮ ਕਿੱਥੋਂ ਮਿਲਿਆ ਇਹ ਕਰਮ ਕੋਲੇ ਇਹਦਾ ਲੇਖਾ ਨਾ ਦਿੰਦੇ ਕਲਮਣਾ ਬਣਿਆ ਕਿਨੇ ਇਹਨੂੰ ਬਣਦੇ ਨੇ ਬਣਿਆ ਜੂੜਦੇ ਹਰਜੀ ਗੱਲ ਹੈ ਬਿਲਕੁਲ ਗੁਰਬਾਣੀ ਹੁਣ ਜਨਮ ਕੀ ਤੋਂ ਬੰਦ ਦੀ ਗੇ ਸਵਾਲੇ ਹੋ ਗਿਆ ਕਰਮ ਤੋਂ ਜਨਮ ਨਹੀਂ ਹੈ ਜਨਮ ਕਿਹੜੀ ਜੀ ਤੋਂ ਉਹ ਕਰਮ ਦਾ ਇਲਾਜ ਕਰ ਰਹੀ ਹੈ ਫੇਖੋ ਜਿਹੜਾ ਕਰਮ ਤੋਂ ਜਨਮ ਬਣਦਾ ਕਰਮ ਦਾ ਇਲਾਜ ਕਰ ਰਹੀ ਕਰਮ ਦਾ ਇਲਾਜ ਕੀ ਕਰਦਣਾ ਦਾਨ ਪੁੱਦ ਕਰਮ ਦਾ ਇਲਾਜ ਕੀ ਹੈ ਦਾਨ ਪੁੱਦ ਨਾਲ ਪੁਰਾ ਮੋਟਾ ਪਾ ਪੂ ਪੂਜਾ ਪਾਠ ਉਹ ਦਾਨਪੁਰਨ ਕੌਨ ਖੰਦਾ ਪੰਡਤ ਉਹਨੇ ਆਪਣਾ ਸਾਧਨ ਬਣਾ ਲਿਆ ਦਾਨਪੁਰ ਕੋਈ ਸਾਧਨ ਅਸੀਂ ਮੰਡੀ ਬੈਠੇ ਆ ਅਖਰਡ ਪਾਠ ਕਰਾਉਨੇ ਆ ਸਾਰਾ ਸਿਸਟਮ ਪਟਡਾਲਾ ਸਾਰੇ ਸਿਸਟਮ ਪੜਨਤਾਲ ਗੁਰਮਤਿ ਕੀ ਤੋਂ ਮੰਦੀ ਹੈ ਜਨ ਨੂੰ ਸਵਾਲਿਆ ਗੁਰਮਤਿ ਮੰਦੀ ਹੈ ਜਨ ਨੂੰ ਪਰਮਤੋਂ ਪਰਮੇ ਭੂਲਾ ਉਹ ਮੰਦਨ ਬੁਕਾਰ ਪੰਜ ਪਿੱਛੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਕਬੀਰ ਮੰਦ ਹੈ ਵਰਤਮਾਨੀ ਹੈ ਏ ਉਹ ਆ ਕੇ ਹਉਮੇ ਤੇ ਖੜੇ ਹੋਵੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਹਉਮੇ ਤੇ ਆ ਕੇ ਖੜੇ ਹੋਗੇ ਨੰਕਾਰ ਤੇ ਤੇ ਕੁਰਾਨ ਕਹਿੰਦੇ ਹਉਮੇ ਕਿੱਥੋਂ ਉਪਜੈ ਕਿਉਂ ਕਿਹਾ ਭਾਈ ਕਹਿੰਦੇ ਹਉਮੈ ਦਾ ਸੋ ਕਿੱਥੋਂ ਪੈਦਾ ਭਾਈ ਆ ਮਾਰੀ ਚੱਕੇ ਗੱਲ ਆ ਉਸੇ ਗੱਲ ਦੀ ਇਹ ਚੱਕੇ ਗਾਂਵਾਰੀ ਹੁੰਦੀ ਦੱਸੋ ਹਮੇ ਕਿਥੋਂ ਪੈਦਾ ਹੋ ਕਿਉਂ ਪੈਦਾ ਹੋਈ ਕਿ ਤੋ ਸਮਝ ਮੈਂ ਇਹ ਜਾਏ ਹਮੇ ਕਿਵੇਂ ਜਾਊਗੀ ਉਹ ਵਸਦੀ ਗੱਲ ਹੈ ਜਉ ਤਾਂ ਨਾਮ ਨਾਲ ਹੈ ਹਮੇ ਨਾਲ ਵਿਰੋਧ ਹੈ ਨਾਮ ਨਾਲ ਹੋਂਦੇ ਦਾ ਵਿਰੋਧ ਹੈ ਜਿਹੜੇ ਕਹਿੰਦੇ ਨੇ ਨਾਮ ਛੱਪੋ ਬਾਲਾ ਫੜ ਲਓ ਜਿਨ੍ਹਾਂ ਚੋਂ ਹੋਂਦੇ ਨਾਮ ਛੱਪੇ ਨਹੀਂ ਜਾ ਸਕਦਾ ਵਿਰੋਧ ਤਾਂ ਵਿਰੋਧ ਸਾਰਾ ਸਿਸਟਮ ਗਲਤ ਹੈ ਸਾਰਾ ਸਿਸਟਮ ਹੈ ਫਰੋਡ ਹੈ ਸਿੱਧੀ ਨਾਲ ਓਏ ਹਉਮੈ ਨਾਲ ਫਰੋਂਹ ਕਹਿਣਾ ਇਹਦੀ ਹਉਮੈ ਦਾ ਦੂਰ ਕਰੋ ਫਿਰ ਨਾਮ ਜਪੂਗਾ ਜਿੰਨਾ ਜੇ ਹਉਮੈ ਆ ਗਈ ਜਦੋਂ ਜਵੇਦੀਆ ਸੋਦਾ ਹਉਮੈ ਨਾਲ ਫਰੋਂਹ ਦਾ ਦੋਇ ਨਾ ਬਸੇ ਇੱਕ ਸਾਂ ਬਸੇ ਜੀ ਹੁੰਦੇ ਇਸੇ ਦੇ ਅੰਦਰ ਸਾਡੇ ਅੰਦਰ ਗੁਰਬਾਣੀ ਕਿਉਂ ਨਹੀਂ ਕਰ ਕਰਦੇ ਹਉਮੈ ਦੇ ਜਿੰਨਾ ਜੇ ਹਉਮੈ ਜਾਂਦੀ ਨਹੀਂ ਗੁਰਬਾਣੀ ਅੰਦਰ ਬਸੇ ਨਹੀਂ ਸਕਦਾ ਬੜੀ ਜਾਓ ਸੁਣੀ ਜਾਓ ਨਾ ਸਰਾਉਣ ਵਾਲੇ ਦੇ ਅੰਦਰ ਬਸੀਆ ਨਾ ਸੁਣ ਵਾਲੇ ਦੇ ਅੰਦਰ ਬਸੇ ਹੋਮੇ ਕਿਵੇਂ ਦੂਰ ਹੋਵੇ ਹੋਮੇ ਪੈਦਾ ਕਿੱਥੋਂ ਹੋਈ ਆ ਦੂਰ ਤਾਂ ਹੋਊਗੀ ਪਹਿਲਾਂ ਪੈਦਾ ਕਿੱਥੋਂ ਹੋਈ ਆ ਹੋਮੇ ਪਰਪ ਤੋਂ ਪੈਦਾ ਹੋਈ ਆ ਕਹਿੰਦੇ ਏਕ ਮਰਦ ਤੇ ਦੋਵੇਂ ਬੂਏ ਦੋ ਮਰਦ ਤੇ ਚਾਰ ਚਾਰ ਮਰਦ ਤੇ 6 ਬੂਏ ਚਾਰ ਬੁਰਖ ਦੋਵੇਂ ਨਾਲ ਉਹ 6 ਕਿੱਥੋਂ ਆ ਗਏ ਉਹ ਤਾਂ ਪੱਜ ਗਏ ਨੇ जिने बीमारी दी जड़ नहीं खोजी उन्हें बीमारी ठीक नहीं दिखी पैदावै सुबह तू पहला रोग पहचान तेनु दा रोग नहीं पहचाननी आए फिर ऐसा दारू लो लो बटे रोगां रोगांस रोग बहुत ने दारू को ही कोई है संसार रोकी नाम, नाम दारू नाम की करता है ਉਹ ਨਾਮ ਕਰਦਾ ਕੀ ਹੈ ਨਾਮਕਰਦਾ ਨਾਸ ਬਿਲਕੁਲ ਨਹੀਂ ਕਰਦਾ ਉਹ ਕਾਲ ਦੀ ਮਾਂ ਦਾ ਨਾਸ ਕਰਦਾ ਕਹਿੰਦਾ ਬੋੜੇ ਨੂੰ ਮਾਰੋ ਬੋੜੀ ਮਾਂ ਨੂੰ ਮਾਰ ਦੋ ਜਿੱਥੋਂ ਉਹ ਮੈ ਪੈਦਾ ਹੁੰਦੀ ਉਹਨੂੰ ਮਾਰ ਦੋ ਉਹਦੀ ਜੜ ਗੰਗੀਆ ਗੁਰਪ੍ਰਸਾਦ ਗੁਰਪ੍ਰਸਾਦ ਨਾਮ ਹੈ ਉਹ ਗਿਆਨ ਦਾ ਪ੍ਰਸਾਦ ਗੁਰੂ ਨੇ ਨਾਮ ਇਹ ਦੇਣਾ ਤੇ ਨਾਮ ਪਾਇਆ ਜਾਏ ਸਤਿਗੁਰੂ ਦਾ ਨਾਮ ਲੈਣਾ ਪ੍ਰਸਾਦਨਾ ਪ੍ਰਸਾਦੋ ਪ੍ਰਸਾਦ ਜਿਹੜਾ ਆਪਨ ਪ੍ਰਸਾਦ ਮੰਦਾ ਸੀ ਗੁਰਪ੍ਰਸਾਦ ਮੰਦਾ ਗੁਰਦੁਆਰੇ ਤੇ ਖੜਾ ਪ੍ਰਸ਼ਾਦ ਲੈਣ ਲੱਗ ਗਏ ਕਲਾ ਪ੍ਰਸ਼ਾਦ ਲੈ ਕੇ ਆ ਜੰਨੇ ਗੁਰਪ੍ਰਸਾਦ ਭੁੱਲ ਗਏ ਕਲਾ ਪ੍ਰਸ਼ਾਦ ਨੂੰ ਗੁਰਪ੍ਰਸਾਦ ਮੰਨਦਾ ਉਹ ਕਹਿੰਦੇ ਜਿਹੜਾ ਹੈ ਉਹਦਾ ਹਉਮੈ ਦਾ ਇਲਾਜ ਕੀ ਹੈ ਗੁਰਪ੍ਰਸਾਦ ਭਰਮ ਦਾ ਕਰਨਾ ਹੈ ਨਾਸ਼ ਨਹੀਂ ਕਰਨਾ ਕਰਮ ਕਾ ਨਾਸ ਕਿਵੇਂ ਹੁੰਦਾ ਗਿਆਨ ਪਿਆ ਤਾਂ ਕਰਮ ਦੇ ਨਾਸ ਉਹ ਕਰਮ ਤਾਂਸੀਂ ਮੰਨਦੇ ਆ ਕਰਦੇ ਆ ਕਰਦੇ ਨਹੀਂ ਹੈਗੇ ਜਦ ਜਾਣੇ ਮੈਂ ਤੇ ਚ ਕਰਤਾ ਕਰਮ ਗਿਆਨ ਮੈਂ ਤਾਂ ਮੰਨਦਾ ਨਾ ਕਰਦਾ ਕਰਦਾ ਕਾਹ ਨੂੰ ਹੈ ਤਾ ਪਾਗਲ ਹੈ ਪੜਾਇਆ ਹੈ ਬੰਮ ਦਾ ਚੇਲੇ ਤਾਂ ਕਹਿੰਦਾ ਮੈਂ ਕਬ ਕਰਦਾ ਸਾਰੇ ਪੰਡਤ ਦੇ ਚੇਲੇ ਨੇ ਜਿਹੜੇ ਕਰਮ ਦੀ ਗੱਲ ਕਰਦੇ ਨੇ ਸਾਰੇ ਪੰਡਤ ਦੇ ਚੇਲੇ ਨੇ ਸੱਤ ਗੁਰਬਾਣੀ की ਕਹਿੰਦੇ ਤੁਸੀਂ ਕੀ ਕਰਦੇ ਹੋ ਤੰਤ जुड़े ਪਏ ਨੇ ਕਹਿੰਦੇ ਬੋਲਤੀ ਬੰਦੇ ਸਭ ਤਾਂ ਨਹੀਂ ਬੋਲਦੇ ਬੋਲਣ ਕੀ ਆਜੋ ਆ ਗੁਰਬਾਣੀ ਨਹੀਂ ਹੋਈਏ ਕੋਈ ਨਹੀਂ ਔਖੀ ਨਹੀਂ ਹੈ ਕੀ ਗੱਲ ਇਹ ਤੇ ਸਮਝ ਨਹੀਂ ਆਉਂਦੀ ਕੋਈ ਬਹੁਤ ਹੋਇਆ ਹੈ ਪਰ ਜੇ ਇਧਰ ਨੂੰ ਜਾਂਦੇ ਰਹੇ ਫਿਰ ਗੱਡੀਆਂ ਨਹੀਂ ਫਿਰ ਬੇਵਕੂਫ ਦੀ ਪੁੱਛ ਨਹੀਂ ਹੁੰਦੀ ਬੇਵਕੂਫ ਨੇ ਇਹਤੇ ਇੰਟੈਲੀਜੈਂਸ ਦੀ ਕੁਛ ਹੁੰਦੀ ਐ ਇਤੇ ਜੀਵਨ ਬਦਲਣਾ ਪੈਂਦਾ ਆ ਆਪਣਾ ਉਹਨਾਂ ਨੇ ਬਦਲਣਾ ਹੈ ਜੀ ਅਗਰ ਦੀ ਉਹਨਾਂ ਨੂੰ ਲੋੜ ਕੋਈ ਨਹੀਂ ਬਹੁਤ ਛੇਤੀ ਸੰਤ ਬਣਨਾ ਘਰਾਂ ਚਾਹੀਦਿਆਂ ਕਿ ਇਹ ਤਾਂ ਉੱਥੇ ਇੱਥੇ ਤਾਂ ਕੋਈ ਦੇਣਾ ਹੀ ਦੇਣਾ ਪੈਂਦਾ ਇੱਥੇ ਤਾਂ ਤਿਆਗ ਹੈ ਤਿਆਗ ਹੈ त्याग है ਵੇਰਾ ਹੋ ਦੇ ਸਾਕੋ ਦੇ ਤਾਨ ਮੰਨ ਤਾਂ ਸਭ ਸੌਂ ਕੋ ਕੋ ਸੁਗੋ ਜੇ ਤਾਂ ਪਹਿਲਾ ਸਾਰਾ ਕੁਝ ਤਿਆਗ ਦੇ ਤਿਆਗ ਹੈ ਫਿਰ ਹੁਕਮ ਮੰਨ ਲੈਵੇ ਤਾਂ ਕਿਤੇ ਜਾ ਕੇ ਪ੍ਰਮਾਣ ਹੁੰਦਾ ਫਿਰ ਸਭ जग ਤੇਰਾ ਹੋਇਆ ਐਨਾ ਕੌਣ ਕਰੇ ਇਹ ਘਾਣਰੀ ਅਸੀਂ ਐਸ਼ਾ ਕਰਦੀਆਂ ਨੇ ਧਰਮ ਦੇ ਸਿਰ ਤੇ ਇਹ ਉਹ ਰਸਤਾ ਉਹਨਾਂ ਦਾ ਸਾਰਾ ਅਜੀਬ ਕਿਦਾ ਇਹ ਰਸਤਾ ਰਸਤਾ ਇਹ ਤਾਂ ਠੱਗਾਂ ਦਾ ਰਸਤਾ ਹੁੰਦਾ ਦੁਨੀਆ ਵਿੱਚ ਕੌਣ ਹੈ ਦੁਨੀਆ ਦੇ ਵਿੱਚ ਵਿਚਾਰੇ ਮੂਰ ਖੰਦ ਖੋਲਣੇ ਲੋਕ ਅਗਿਆਦੀ ਲੋਕ ਅਗਰ ਅਸਾਂ ਕਬੂਰ ਕਾਸੇ ਹੋਰ ਗੁਰਮਾਨੇ ਕਹਿੰਦੇ ਅਸਾਂ ਚੋਰ ਹਰਾਮ ਖੋਰਾ ਤਰਫ ਦੇਣਾ ਉਹ ਤੇ ਚੋਰ ਹਰਾਮ ਖੋਰਾ ਉਪਦੇਸ਼ ਕਰਨਾ ਕਿ ਜਿੱਦੇ ਕਿਸੇ ਨੂੰ ਕੁਛ ਨਹੀਂ ਕੋ ਦੇਣ ਦਾ ਤਾਂ ਕਿ ਬੱਲੇ ਹੋਵੇ ਦੱਸਦੇ ਕਿਸੇ ਨੂੰ ਕੁਛ ਨਹੀਂ ਠੱਗੇ ਮਾਰ ਦੇ ਝੂਠ ਬੋਲ ਇਸ ਕਰਕੇ ਸੱਚੀ ਬਾਣੀ ਹੈ ਕਿਉਂ ਕਿ ਆ ਸੱਚੀ ਬਾਣੀ ਹੈ ਇਹਦਾ ਮਤਲਬ ਝੂਠੀਆਂ ਬਾਣੀਆਂ ਨੇ ਬਾਕੀ ਸਭ ਜਿਹੜਾ ਸੱਚ ਦਾ ਬੋਲਣਾ ਬੜਾ ਔਖਾ ਆਖਣ ਔਖਾ ਬਹੁਤ ਔਖਾ ਸੱਚਾ ਨਾਮ ਦਾ ਪ੍ਰਚਾਰ ਕਰਨਾ ਸੱਚੇ ਨਾਮ ਦੀ ਵਿਆਖਿਆ ਕਰੀ ਬਹੁਤ ਔਖੀ ਤੇ ਔਖੀ ਦੀ ਹੈ ਸੱਚ ਬੋਲਣਾ ਹੀ ਔਖਾ ਸਾਨੂੰ ਤਾਂ ਮੁੱਲ ਸਾਡੇ ਦਾ ਬੋਲੀਓ ਝੂਠ ਸੀ ਜਿਹਨੂੰ ਮਾਂ ਕਹਿੰਦੇ ਮਾਂ ਦੀ ਜਿਹਨੂੰ ਬਾਪ ਕਹਿੰਦੇ ਬਾਪ ਦੀ ਜਿਹਨੂੰ ਪੁੱਤ ਕਹਿੰਦੇ ਪੁੱਤ ਦੀ ਜਿਹਨੂੰ ਮੇਰਾ ਕਹਿੰਦਾ ਮੇਰਾ ਦੀ ਜਿਹਨੂੰ ਜੱਬਣ ਕਹਿੰਦਾ ਜੱਬੜ ਦੀ ਜਿਹਨੂੰ ਮਾਲਕ ਕਹਿੰਦੇ ਮਾਲਕ ਦੀ ਸੱਚ ਕੀ ਹੈ ਸਾਡੇ ਕੋਲ ਕੁਝ ਨਹੀਂ ਸੱਚ ਦਾ ਕੁਝ ਨਹੀਂ ਜਿਹਨੂੰ ਮੇਰੀ ਕਹਿੰਦੇ ਮੇਰੀ ਜਿਹਨੂੰ ਤੇਰੀ ਕਹਿੰਦੇ ਤੇਰੀ ਸਾਰਾ ਕੁਛ ਹੈ ਝੂਠ ਹੈ ਸਾਡੇ ਕੋਲ ਸਾਡੀ ਭਾਸ਼ਾ ਹੀ ਝੂਠਿਆਂ ਦੀ ਹੈ ਮਾਇਆ ਝੂਠੀ ਹੈ ਸੰਸਾਰ ਝੂਠਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਕੂੜ ਵਿੱਚ ਕੂੜ ਦੇ ਰਾਜ ਵਿੱਚ ਕੂੜ ਦੇ ਦਰਬਾਰ ਵਿੱਚ ਕੂੜ ਦੇ ਪਸਾਰੇ ਵਿੱਚ ਸੱਚ ਬੋਲਣਾ ਬੜਾ ਔਖਾ ਹੈ ਬਾਸ਼ਾ ਨਵੀਂ ਚਾਹੀਦੀ ਹੈ ਬੋਲੀ ਨਵੀਂ ਚਾਹੀਦੀ ਹੈ ਇਸ ਕਰਕੇ ਵਿਦਿਆ ਸੋਧਦੇ ਵਿਦਿਆ ਸੋਧਣੀ ਪਊਗੀ ਤੁਹਾਨੂੰ ਤਾਂ ਸੱਚ ਨਹੀਂ ਇਹ ਸੋਧੀ ਹੋਈ ਵਿਦਿਆ ਗੁਰਬਾਣੀ ਦੀ ਔਰ ਗੁਰਪ੍ਰਸਾਦ ਭਰਮ ਕਾ ਨਾਸ ਹੈ ਕਰਮ ਕਾ ਨਾਸ ਕਿੱਥੇ ਲੈ ਕੇ ਕਰਮ ਕਾ ਨਾਸ ਸਾਡਾ ਭਰਮ ਹੈ ਕਰ ਮੰਦਿਆ ਜਿਹੜਾ ਅਸੀਂ ਮੈਂ ਕੁਝ ਕਰ ਸਕਦਾ ਭਰਮ ਇਹ ਭਰਮ ਦਾ ਨਾਸ ਤਾਂ ਗਿਆਨ ਨਾਲ ਆਪੇ ਹੋ ਜਾਣਾ ਗਿਆਨ ਨਾਲ ਜਦ ਭਰਮ ਦਾ ਨਾਸ ਹੋਣਾ ਕਰਮ ਦਾ ਆਪੇ ਹੋ ਜਾਣਾ ਜਿਹੜਾ ਮੇਰਾ ਮੈਂ ਤੁਨ ਜਾਂ ਭਰਮ ਦਾ ਨਾਸ ਹੋਣਾ ਮੇਰਾ ਮੈਂ ਬੁੱਧ ਹੋਈ ਜੀ ਜਿਹਨੂੰ ਮੈਂ ਬਾਪ ਮੰਨਤਾ ਜਾਂ ਭਰਮ ਦਾ ਨਾਸ ਹੋਣਾ ਰੱਬ ਹੈ ਨਹੀਂ ਭਰਮ ਦੇ ਨਾਸ ਨਾਲ ਸਾਰੇ ਕੁਝ ਨਾਸ ਹੋ ਜਾਣ ਹਾਂਜੀ ਜਦ ਆਕਾਰ ਇੱਕ ਅਸੁਰ ਜਦ ਆਕਾਰ ਇੱਕ ਅਸੁਰ ਜਾਦੇ ਦਾ ਕੋਈ ਆਕਾਰ ਨਹੀਂ ਸੀ ਦੇਹ ਨਹੀਂ ਸੀ ਪਾਪ ਨੂੰ ਤੇ ਹੋ ਕੇ ਗਿਆ ਇਹ ਦੱਸੋ ਜਿਹੜੇ ਪਾਪ ਦਾ ਲੇਖਾ ਦੇਣ ਆਇਆ ਤੁਸੀਂ ਕਹਿੰਦੇ ਹੋ ਇਹਨੇ ਕਿਹੜੇ ਵੇਲੇ ਕੀਤਾ ਉਹ ਪਾਪ ਨੂੰ ਸਰੀਰ ਧਾਰ ਕਹੀ ਕਰਦਾ ਪਾਪ ਇਆ ਬੇ ਹੁਣ ਸਰੀਰ ਵਾਲੇ ਪਾਪ ਉਹ ਨਹੀਂ ਬਿਨਾਂ ਸਰੀਰ ਦੇ ਤੇ ਪਾਪ ਉਹ ਰੂਹ ਦੇ ਸਰੀਰ ਨੂੰ ਪਾਪ ਉਹ ਨਹੀਂ ਆਏ ਮੰਨੋ ਯਾਤਾਰ ਤੁਸੀਂ ਬੋਲੋ ਸਰੀਰ ਨਾਲ ਜੋ ਕਰਦਾ ਤੁਹਾਨੂੰ ਬਾਪ ਹੈ ਜੀ ਜੋ ਬਿਨਾਂ ਸਰੀਰ ਤੇ ਕੀਤਾ ਦੀ ਉਹ ਪਾਪ ਸੀ ਉਹ ਪਾਪ ਸੀ ਉਹ ਦੱਸੋ ਫਿਰ ਕੀ ਸੀ ਜੇ ਸਰੀਰ ਨਾਲ ਹੁੰਦਾ ਤਾਂ ਪਹਿਲਾ ਸਰੀਰ ਦੇ ਕੋਲ ਕੀਤਾ ਉਹਦੀ ਵਜ੍ਹਾ ਕੀ ਸੀ ਉਹ ਦੱਸੋ ਅੱਗੇ ਫਸਾਤ ਲੈ ਆ ਕੇ ਅੱਗੇ ਕਰਨਾ ਨਹੀਂ ਰਸਤੇ ਇਕ ਅੱਲਾ ਜਵਾਬ ਹੀ ਨਹੀਂ ਹੈ ਜਦ ਤਾਰੀ ਆਪਨ ਸੁਣਨ ਸਮਾਜ ਤਬ ਬੈਰ ਵਿਰੋਧ ਕਿਸੇ ਸੰਗੋ ਕਮਾਤ ਜਦ ਤਾਰੀ ਆਪਨ ਸਿਰਫ ਜਾਤੂ ਸੁਭ ਸੁਭਿਸ਼ਵਾਸੀ ਤੇਰੇ ਅੰਦਰ ਇੱਛਾ ਹੀ ਕੋਈ ਨਹੀਂ ਤੇ ਕਿਸਨ ਅਕੀਤਲੀ ਤੇ ਬੈਰ ਬੁਰੋ ਤੱਕੀ ਤਾ ਦੀ ਤੈਨੂੰ ਜਲਬ ਕਿਉਂ ਮਿਲ ਗਿਆ ਭਾਈ ਉਦੋਂ ਤਾਂ ਬੈਰ ਬੁਰੋ ਤਕਮਾਇਆ ਦੀ ਕਿਸੇ ਨਾਲ ਕਮਾਇਆ ਦੀ ਅਸਰ ਦਾ ਸੁਣਨ ਸਮਾ ਸੁਤਾ ਪਿਆ ਆ ਜੀ ਬੈਰ ਬੁਰੋ ਕਬਲ ਕਰੂ ਉਹ ਆਦਮੀ ਆਪਣਾ ਸੁੱਤਾ ਪਏ ਸੁਪਨਾ ਵੀ ਨਹੀਂ ਦੇਖਦਾ ਉਹ ਬੈਰਬੋਦ ਕਰੂਗਾ ਤਾਂ ਉਹ ਤਾਂ ਜਾਗਦਾ ਹੀ ਕਰੂਗਾ ਇਸਨਾਂ ਆਰਾ ਸੁਪਰ ਕੇ ਕਿਸੇ ਨਾਲ ਨਹੀਂ ਹੋਗਾ ਬੈਰਬੋਦ ਕਿਸ ਸੰਗਲ ਕਮਾਤ ਕਿਹਦੇ ਨਾਲ ਬੈਰਬੋਦ ਕਮਾਉਂਦਾ ਉਹ ਤਾਂ ਇਕੱਲਾ ਹੀ ਹੈ ਦੁਆ ਹੈ ਨਹੀਂ ਕੋਈ ਹਾਂਜੀ ਜਦ ਇਸ ਦਾ ਬਰਜ ਚਹਿਣਾ ਤਬ ਹਰ ਸੁਖੋਗ ਤੋ ਕਿਸੇ ਜਦੋਂ ਇਹ ਹਰ ਇਹਦਾ ਬਰਜ ਚਹਿਣ ਦੀ ਸੋਈ ਸੁੱਤੇ ही ਪਿਆਸੀ ਸੁੱਤੇ ਨੂੰ ਹਰਖ ਹੋਗ ਨਹੀਂ ਹੁੰਦਾ ਹਰ ਸੋ ਸੁਪਨੇ ਹੀ ਹੁੰਦੇ ਜੇ ਸੁੱਤਾਰ ਹੋ ਜਿੰਨਾ ਜਦ ਹਰਖ ਹੋਗ ਨਹੀਂ ਹੈ ਤੇ हो ਆਵੇ ਉਹ ਹਰਖ ਹੋ ਸਕਦਾ ਇਹ ਹੁਣ ਸੁਪਨੇ ਮਾਸਟਰ ਜਾਗਦਾ ਹਰਖ ਹੋਣਾ ਜਾਗਦਾ ਹੁਣ ਲਈ ਇਹ ਸੁਪਨੇ ਜਰਖ ਹੋ ਗਿਆ ਜਿੰਨਾ ਜਦ ਦੇਖੋ ਗੱਲ ਸੁੱਤੇ ਸਬਤ ਹੋਈ ਗੱਲ ਤੇਰੇ ਤੇਰੇ ਤੇ ਦਾ ਹਸਾਬ ਦੇਣ ਆਇਆ ਉਹਰੇ ਤੇਰੇ ਤੇ ਦਾ ਘਾਟਾ ਪੂਰਾ ਕਰਨ ਆਇਆ ਇੱਥੇ ਤੇ ਤੇ ਤਾਂ ਕੰਮ ਹੋ ਨਹੀਂ ਸਕਦੇ ਸੀ ਫਿਰ ਪੈਰਬੋਧ ਵੀ ਇੱਥੇ ਨਾ ਕੀਤਾ ਪੈਰਬੋਧ ਇਹਦੇ ਕੋਲ ਕਿੱਥੋਂ ਆਇਆ ਇਹ ਦੱਸੋ ਹਾਂਜੀ ਜਦ ਇਸ ਦਾ ਬਾਰਨਟ ਹੈ ਨਾ ਜਾਪਤ ਸਭ ਤੋਂ ਕਿਸੇ ਵਿਆਪਕ ਹਰਖ ਸੋਖ ਕਿੱਥੋਂ ਆ ਗਿਆ ਇਹ ਦੱਸੋ ਜਾਦਾ ਬੜ ਚੜਰੇ ਨਹੀਂ ਇਸ ਕੋਈ ਇਹਦਾ ਆਪਣਾ ਵजूद ਨਹੀਂ ਸੀ ਕੋਈ ਤੇ ਵਿजूद ਦਾ ਨਾ ਘਟਾਵਦਾ ਹੀ ਨਹੀਂ ਕੋਈ ਵਿजूद ਨਾਲੇ ਜਾਂ ਸਾ 50 ਹੈ ਵਿजूद ਨਾਲੇ ਮੌਤ ਹੈ ਜਿੰਦਗੀ ਮੌਤ ਹੈ ਵਿजूद ਨਾਲੇ ਘਟਾਵਦਾ ਜੇ ਵਿजूद ਹੈ ਕੋਈ ਦੀ ਇਹਨੂੰ 6 ਗੱਲਾਂ ਦੱਸ ਲਾ ਕੋ ਦੀ ਜਾਂ ਸਾ 50 ਸਲਾ ਕੋ ਦੀ ਸਾਡੀ লাভ ਲਾ ਕੋ ਦੀ ਜਮਨ ਮੰਨ ਲਾ ਕਿਹੜੀ ਗੱਲ ਦਾ ਸੀ ਇਹਨੂੰ ਇਹ ਦੱਸੋ ਉਹਨਾਂ ਦਾ ਸਾਰਾ ਹੀ ਜੋ ਫਲਸਫੀਆ ਇੱਕ ਕਰਕੇ ਕੱਟ ਕੇ ਉਹ ਮਰ ਜਾਂਦੇ ਪਤਾ ਸਿੱਖ ਨੂੰ ਪਤਾ ਇਹ ਗੱਲਾਂ ਦਾ ਅਰਥ ਨਹੀਂ ਉਹਨਾਂ ਦੀ ਫਲਸਫੀ ਕੀ ਸੀ ਇਹ ਕੀ ਕਹਿ ਰਹੇ ਆ ਵੱਡਾ ਦਿਮਾਗ ਸੰਤ ਕੱਠੇ ਹੋਏ ਨੇ ਵੱਡਾ ਦਿਮਾਗ ਨਾ ਉਹਨਾਂ ਨੂੰ ਹਿੰਦੂ ਦਾ ਪਤਾ ਫਲਸਫੀ ਕੀ ਹੈ ਨਾ ਗੁਰਮਤ ਦਾ ਪਤਾ ਕੀ ਫਲਸਫੀ ਸੀ ਪਿੱਛੇ ਕੀ ਪੜ੍ਹਾਈ ਸੀ ਇਹ ਤੁਮਰ ਦੀ ਗ੍ਰੰਥਾਂ ਦੀ ਉਹਦੇ ਖਿਲਾਫ ਕੀ ਲਿਖਿਆ ਹੋਇਆ ਹੈ ਕਿੱਕ ਡਿਸਕਸ਼ਨ ਹੈ ਬੜੀ ਸੁਪਰੀਮ ਕੋਰਟ ਦੇ ਵਕੀਲ ਹੁੰਦੇ ਨੇ ਇੱਕ ਵਿਚਾਰਧਾਰਾ ਵਿਚਾਰਧਾਰਾ ਖੰਡਣ ਕੀਤੀ ਉਹਨਾਂ ਝੂਠੇ ਵਿਚਾਰਧਾਰਾ ਤੁਹਾਡੇ ਹਰ ਜੀ ਵਿਚਾਰਤਾ ਰਹੋ ਜੋ ਵਿਚਾਰਤਾ ਦਾ ਸਾਨੂੰ ਬੇਸ਼ਕ ਕੀਤੀ ਸੀ ਇਹ ਦੂਜੇ ਸਿਰ ਪਰ ਤੇ ਬੇਦ ਪੁਰਾਣ ਪਕਾਰਣ ਕੋਥੀਆਂ ਨਾ ਕੂੜ ਆ ਕੂੜ ਸਾਬਤ ਕੀਤਾ ਕੂੜ ਹੈ ਕੂੜ ਨਾ ਬਿਨਾ ਸਭ ਕੂੜ ਗੱਲ ਗੱਲਾਂ ਨੇ ਇਹ ਸਾਬਤ ਕੀਤਾ ਅਸ਼ਪਤੀ ਦੇ ਵਿੱਚ ਇਹ ਜੋ ਹੈ ਸਾਰਾ ਤੁਸੀਂ ਝੂੜ ਦਾ ਪ੍ਰਚਾਰ ਕੀਤਾ ਹਾਂ जब अपन आप आप पार ब्रह्म तब वो कहां किस होवत है ब्रह्म हो गया कहता हो गया शुद्ध समाध शुद्ध ये सहज में आया जाग गया कहता है सुता पेया जा जब जागदा फिर ये ब्रह्म से पार ब्रह्म हो जाता है जब जागदा नहीं तो सुन्ना ना सुता पेया फिर वो जाग गया हुई जाग गया ਜਿਹੜਾ ਪੂਰਨ ਬ੍ਰਹਮ ਸੁਤਾ ਪਿਆ ਉਹਦੀ ਵਿਵਸਥਾ ਦੱਸਦੀ ਵੀ ਉਹਨੂੰ ਕਿਵੇਂ ਮੋਹ ਹੋਇਆ ਕਿਵੇਂ ਭਰਮ ਹੋਇਆ ਹੋ ਨਹੀਂ ਸਕਦਾ ਕਿ ਉਹ ਜਾਗਦਾ ਕੋਲ ਪ੍ਰਭੂ ਜਾਗਦਾ ਸ਼ਾਇਦ ਵਿੱਚ ਆਉਂਦਾ ਤਾਂ ਉਹ ਫਿਰ ਪਾਰ ਬ੍ਰਹਮ ਹੋ ਜਾਂਦਾ ਜੇ ਪਾਰ ਬ੍ਰਹਮ ਦੀ ਅਵਸਥਾ ਆਪਾਂ ਬਣ ਲਓ ਤੁਸੀਂ ਵੀ ਪਾਰ ਬ੍ਰਹਮ ਹੋ ਕੇ ਜਾਗੇ ਤੇ ਬਾਅਦ ਇਹ ਕੁਝ ਹੋਇਆ ਸੁਣ ਤੋ ਬਾਅਦ ਜਾਗੇ ਤੋਂ ਹੋਇਆ ਉਹ ਜਾਗਣ ਵਾਲੀ ਗੱਲ ਚੱਕਲੀ ਤੈਨ ਨਾਲ ਆਵਸਦਾ ਸਤਿ ਤੇਗਲ ਆ ਗਈ ਸੁੱਤੇ ਤੇ ਤੈਨਾਂ ਨੇ ਆ ਨਾ ਸੁੱਤੇ ਤੇ ਤੈਨ ਆ ਗਈ ਪਰ ਬੋਲ ਨਹੀਂ ਹੋ ਸਕਦਾ ਪਾਪ ਨਹੀਂ ਹੋ ਸਕਦਾ ਹਰ ਜੋ ਵੀ ਹਰ ਜੋ ਵੀ ਤੈਨ ਆ ਮਾਇਆ ਨਾ ਹੁਣ ਕਹਾ ਜੇ ਜਾਗ ਪਿਆ ਉਹ ਆਦਮੀ ਹੁਣ ਉਹ ਆਦਮੀ ਆਪ ਕਹਿ ਰਿਹਾ ਵੀ ਜਾਗਰ ਤੋਂ ਵਸਤਾ ਚੱਲ ਤੋਂ ਬਾਹਰ ਆ ਗਈ ਹਾਂ ਜਦ ਆਪਨ ਆਪ ਪਰਬ੍ਰਹਮ ਤਬ ਉਹ ਕਹਾਂ ਕਿ ਸਹੋਬਤ ਪਰ ਇਹੋ ਆਪ ਪਰਬ੍ਰਹਮ ਹੀ ਹੋ ਗਿਆ ਤੋ ਉਹ ਹੋਗੇ ਤੂੰ ਪਰਬ੍ਰਹਮ ਉਹ ਨਾ ਉਹ ਬੰਦੇ ਦੀ ਪਰਬ੍ਰਹਮ ਉਹ ਨਹੀਂ ਹੁੰਦਾ ਉਹ ਉਹਨਾਂ ਦੇ ਗ੍ਰੰਥ ਬੰਦੇ ਨੇ ਜਿਹੜੇ ਉਹਨਾਂ ਦੇ ਗ੍ਰੰਥ ਬੰਦੇ ਨੇ ਇਹ ਉਹ ਦਿਖਾਈਆਂ ਇਹ ਰੂਲਿੰਗ ਜਿਵੇਂ ਹਾਈ ਕੋਰਟ ਸੁਪਰੀਮ ਕੋਰਟ ਰੂਲਿੰਗ ਦਿਖਾਉਂਦੇ ਆ ਉਹਨਾਂ ਦੇ ਗ੍ਰੰਥਾਂ ਦੀਆਂ ਆਹ ਦੇਖੋ ਥੋੜਾ ਦੇਖ ਆ ਜੇ ਪਰਬ੍ਰਹਮ ਹੈ ਫਿਰ ਉਹਨੂੰ ਤੁਸੀਂ ਕਹਿੰਦੇ ਹੋ ਨਹੀਂ ਹੁੰਦਾ ਜੋ ਸੋ ਬੜਾ ਗੰਤਗਾ ਨਾ ਹੋਉਂਦਾ ਇਹ ਬੈਸ ਹੋਈ ਹੋਈ ਆ ਜਦੋਂ ਸੁਪਰੀਮ ਕੋਰਟ ਦੀ ਹੁੰਦੀ ਹੈ ਬੈਸ ਦੋ ਧਰਮਾਂ ਦੇ ਵਿੱਚ ਡਿਸਕਸ਼ਨ ਹੈ ਫਿਰ ਨੂੰ ਤਾਂ ਹੁੰਦਾ ਨਾ ਉਹ ਪਰਮਾ ਨਾ ਉਹ ਪਰਮਾ ਤੋਂ ਬਿਨਾ ਉਹ ਨਹੀਂ ਹੁੰਦਾ ਨਾ ਉਹਦੇ ਵਿੱਚ ਪਰਮਾ ਨਾ ਉਹ ਜੁਈ ਆਪਾਂ ਪਰਮਾ ਉਹ ਉਹ ਜੋ ਗੱਲ ਕਰਨੇ ਉਦੇ ਉਹ ਕੋ ਨਾ ਕਰਨਾ ਕੋਣ ਕਰੂਗਾ ਉਹ ਤਾਂ ਫਿਰ ਉੱਪਰ ਵੀ ਕੋਈ ਦੱਸੋ ਕੌਣ ਭਾਈ ਆਪਨ ਖੇਡ ਆਪ ਵਰਤੀਜਾ ਨਾਨਕ ਕਰਦੇ ਹਾਰ ਨਾ ਦੂਜਾ ਹੁਣ ਕੀ ਹੈ ਉਹਦਾ ਜਵਾਬ ਦਿੰਦੇ ਇਹ ਤਾਂ ਇਹ ਪੱਕਾ ਆਪੇ ਲਿਆ ਇਹਨੇ ਆਪਣਾ ਖੇਲ ਆਪੇ ਵਰਤਾਇਆ ਕੋਈ ਇਹ ਜਿਹੜੀ ਬਿਮਾਰੀ ਆ ਇਹਨੇ ਆਪੇ ਛੇੜੀ ਹੈ ਕਿ ਮੈਂ ਇੱਥੇ ਗੋਲ-ਮੋਲ ਗੱਲ ਕਰਕੇ ਪੇਦਾ ਜਿਹੜਾ ਖੇਡ ਹੈ ਨਾ ਆਇਆ ਜੇ ਖੇਡਦਾ ਇਹ ਆਵੇ ਕਰਿਆ ਨਿਆਲੇ ਸ਼ਰਾਰਤ ਸ਼ਰਤ ਖੜੀਏ ਸੱਟ ਖਾ ਲਈ ਬਾਲ ਮਰੇ ਬਾਲਕੀ ਲੀਲਾ ਬਾਲਾ ਨਾ ਜਿਹੜਾ ਪਰ ਇਹ ਚੌਧਰੀ ਬਣ ਗਿਆ ਇਹ ਲੱਗਿਆ ਤਾਰਾ ਘੋੜਨਾ ਕ੍ਰੋਧ ਲੱਗੀ ਇੱਕ ਵਾਰਾ ਮਾਰਿਆ ਗਿਆ ਇਹ ਛੇੜ ਬੈਠਿਆ ਗਰੰਟਰੂ ਉਲਟਾ ਵਰਤਤਾ ਕੁਝ ਹੋਰ ਲੱਗਿਆ ਸੀਗਾ ਦੇਖ ਕੇ ਰੀਸ ਕਰ ਲੱਗਿਆ ਸੀ ਕੁਝ ਤੇ ਮਜਾਣੇ ਰੀਸ ਕਰ ਲੈਂਦੇ ਨੇ ਉਹ ਲੱਗ ਗਈ ਗਰੰਟੇ ਕੇ ਬਾਸੇ ਮਾਰੇ ਗਏ ਹਾਂਜੀ ਇਹਦਾ ਇਹਨੇ ਆਪਣਾ ਖੇਲ ਆਪੇ ਵਰਤਾਇਆ ਕੋਈ